पावन पतित पुनीत कतह नहीं सेवियै झूठे रंगी खवार कहां लगखेवी है पावन पतक पावन ओ भी हो, हो जांदे ने पुनीत होंदे ने ओ भी पतित हो सकदे दे जे ओ अपने माने अहंकार हो जवे अपने माने चिल्लाना सी हां काते ही जे सेवा ते आग झूठे रंग खवार ਜੋ ਤੇ ਰੰਗ ਦੇ ਵਿੱਚ ਮਾਇਆ ਦੇ ਰੰਗ ਤੇ ਭੋਣ ਕਰਕੇ ਹੁੰਦੇ ਨੇ ਫਿਰ ਉਹ ਹਰ ਨੂੰ ਛੱਡ ਕੇ ਖਵਾਰੀ ਹੁੰਦੀ ਹੈ ਮਾਇਆ ਨਾਲ ਜੁੜ ਕੇ ਖਵਾਰੀ ਹੁੰਦੀ ਹੈ ਕਾਲਕ ਕੀ ਵੀ ਹੈ ਉਹ ਦਾਨਪੁਣ ਕਰਮਕਾਂਡ ਜੋ ਮਰਜੀ ਕਰ ਲੈਣ ਅੱਛਾ ਜੀ ਇਹ ਕਰਮਕਾਂਡ ਹੈ ਜਿਵੇਂ ਕਹਿੰਦਾ ਕਬੀਰ ਕਾਗਦ ਕੀ ਉਬਰੀ ਮਸਕੇ ਕਰਮਕ ਪਾਠ ਕਿ ਜੀ ਕਰਮ ਆਉ ਮਾਸਟਰ ਕਰਮ ਕਪਾੜੇ ਕਰਮ ਕਾੜਨੇ ਇਹਨੂੰ ਇਹ ਕੇ ਵੀ ਇਹ ਕਹਿ ਵੀਦੇ ਸੇਵਾ ਤੇ ਪਾਣੀ ਜਾਏ ਹੁਕਮ ਮੰਨੇ ਉਹ ਨਹੀਂ ਪਾਵਨ ਹੋ ਸਕਦੇ ਨਹੀਂ ਪੁਨੀਤ ਹੋ ਸਕਦੇ ਠੀਕ ਹੈ ਜੀ ਇਹ ਛੰਦ ਨੈਗੇਟਿਵ ਚ ਹੈ ਜੀ ਨਾਲੇ ਮਿਲਦੇ ਬਰੋਚਾ ਚ ਪੁਨੀਤ ਸੀ ਉਸ ਤੋਂ ਬਾਅਦ ਫਿਰ ਪਾਵਨ ਤੋਂ ਪਤਿਤ ਹੋ ਗਏ ਆ ਕੀ ਸੇਵਾ ਛੱਡ ਥੋੜਾ ਪਾਣੀ ਜਾ ਕੇ ਨਾ ਗਾਲ ਹੋ ਗਿਆ ਨਾ ਠੀਕ ਹੈ ਝੂਠੇ ਰੰਗ ਖੁਆਰ ਕਹਾਂ ਲੱਗ ਕੇ ਝੂਠੇ ਜਾਂਦਾ ਝੂਠਾ ਰੰਗ ਸੱਚੇ ਜਾਂਦਾ ਸੱਚਾ ਰੰਗ ਜਿੰਤੇ ਤੱਕ ਮਰਜੀ ਮਨਮਤਾਂ ਦੇ ਜਿਹੜੇ ਤੁਸੀਂ ਉਹ ਬੇੜੇ ਬਣਾ ਲਓ ਨਹੀਂ ਪਾਰ ਹੋ ਸਕਦਾ ਮਨਮਤਾਂ ਦੇ ਬੇੜੇ ਨਹੀਂ ਪਾਰ ਸੰਕਰ ਸਕਦੇ ਪਾਰ ਕਿਵੇਂ ਹੋਊਗਾ ਤਨਮਨ ਤਨਸਾਭ ਸਾਫ ਗੁਰ ਕੋ ਹੁਕਮ ਮੰਨਿਆ ਭਾਈਏ ਹੁਕਮ ਮੰਨ ਕੇ ਬਣੀ ਹੁਕਮ ਮੰਨਿਆ ਤਾਂ ਤਨਮਨ ਪਹਿਲਾਂ ਸੋਪਿਆ ਹੋਇਆ ਜਿਹੜਾ ਹੁਕਮ ਦੇ ਵਿੱਚ ਤਨਮਨ ਸੌਂਫ ਕੇ ਹੁਕਮ ਜਾ ਸਕਦਾ ਠੀਕ ਹੈ ਜੀ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਉ ਬਲਹਾਰੀ ਤਿੰਨ ਜੇ ਦਰਗਹ ਜਾਣੇ ਮਨ ਮਤਾਂ ਦੇ ਜਿਹੜੇ ਗੁਰੂ ਬਣ ਜਾਂਦੇ ਨੇ ਉਹ ਹਰ ਚੰਦੌਰੀ ਹੈ ਚੰਦਰਮਾ ਜਨਾ ਗਿਆਨ ਆ ਇਹਨਾਂ ਮਤਾਂ ਦੇ ਛੂੜਦੇ ਨਹੀਂ ਕਿੜਦਾ ਹੁੰਦਾ ਇਹ ਵਿੱਚ ਚੰਦਰਮਾ ਦੀ ਕੋਈ ਪੂਰਨਮਾਸ਼ੀ ਦਾ ਕੋਈ ਵੇਲਾ ਨਹੀਂ ਹੁੰਦਾ ਖੱਲੇ-ਤੱਲੇ ਨਹੀਂ ਹੁੰਦੇ ਨੇ ਜਿਹੜੇ ਚੱਤਰ ਪੰਜ ਗਿਆਨ ਵਾਲੇ ਨੇ ਹਰ ਹੈ ਅਜਾ ਦੂਸਰੀ ਮਤਾਂ ਦੀ ਗੱਲ ਆ ਖੁबीर ਕਹਿੰਦਾ ਨਾ ਜਦ ਕੱਠੀ ਜਾਣੀਓ ਤੁਸੀਂ ਤੇ ਸੁਖ ਦੀਦ ਪਿਆਏ ਜਿਹੜੇ ਆ ਦੂਏ ਸੰਤ ਬਣੇ ਫਿਰਦੇ ਨੇ ਨਾ ਜਿਹਨਾਂ ਦੇ ਬੜੇ ਬੜੇ ਚੇਲੇ ਨੇ ਬੜੀ ਬੜੀ ਮਾਇਆ ਚੜਦੀ ਹੈ ਮੰਨਤਾ ਬੜੇ ਬੜੇ ਧੇਰੇ ਨੇ ਪਦਾਰਥ ਬੇਅੰਤ ਨੇ ਉਹਨਾਂ ਦੀ ਗੱਲ ਕਰਦਾ ਕਹਿੰਦੇ ਤੈਨੂੰ ਸੁੱਖ ਨਹੀਂ ਰਿਹਾ ਇਹ ਹਮੇ ਜੋ ਪੂਜਾ ਭੂਜਣਾ ਪੂਰੀ ਤਰੀਕਾ ਲਾਏ ਨੇ ਬੁਝਾਤ ਨਹੀਂ ਬੁਝੀ ਸੁੱਖ ਮਨ ਦੀ ਪਹੁੰਚ ਗਏ ਸਭ ਕਹਿੰਦੇ ਪਾਇਆ ਹੈ ਨਹੀਂ ਕਿਸੇ ਕਹਾ ਹਾਂ ਸਭ ਪੈਸੇ ਪਾਇਆ ਉਹਨਾਂ ਦੀ ਗੱਲ ਕਰ ਰਿਹਾ ਹਰ ਹਾਂ ਹਉ ਬਲਹਾਰੀ ਤਿੰਨ ਜੇ ਦਰਗਹ ਜਾਣਿਆ ਜਿਹੜਾ ਨੇ ਦਰਗਾਹ ਨੂੰ ਜਾਣ ਲਿਆ ਉਹਨਾਂ ਦੇ ਬਲਹਾਰੀ ਜਿਨ੍ਹਾਂ ਨੇ ਜਾਣ ਲਿਆ ਸੱਜ ਖੰਡ ਤੱਕ ਜਿਨ੍ਹਾਂ ਨੇ ਦਰਸ਼ਨ ਹੋ ਗਿਆ ਸਮਝ ਆ ਗਈ ਉਹਨਾਂ ਦੇ ਦਰ ਗੁਰੂਆਂ ਹੇਰਾਣੂ ਕੀ ਗੱਥੀ ਉਹ ਆਪਣੇ ਆਪ ਆਪੇ ਫਰਮ ਆਪੇ ਸੰਤ ਬਣੇ ਹੋਏ ਨੇ ਇਹ ਤਾਂ ਕਹਾਂ ਦੇ ਨੇ ਸੰਤ ਕਹਾਂ ਦੇ ਨੇ ਫਰਮ ਗਿਆਨੀ ਕਹਾਂ ਦੇ ਨੇ ਬੜੇ ਬੜੇ ਆਪਣੇ ਬੋਰਡ ਹੋਲਡਿੰਗ ਲਾਗ ਨੇ ਆਪਣੀ ਚੱਟਿਆ ਆਪ ਕਰਵਾਉਂਦੇ ਨੇ ਹਰ ਹਾਂ ਹੋਂ ਬਲਹਾਰੀ ਤਿੰਨ ਨਾ ਮੈਂ ਤਾਂ ਬਸ ਉਹਨਾਂ ਦੇ ਕਰਵਾਣੇ ਜਾ ਸਕਦਾ ਹੋਰ ਕੁਛ ਈ ਉਹਨਾਂ ਬਾਰੇ ਕਹਿ ਸਕਵੇ ਤੁਸੀਂ ਇਹ ਗਿਆਨ ਪ੍ਰਾਪਤ ਕਰਕੇ ਆਪਣਾ ਦਰਗਾਹ ਚ ਮਾਨ ਪ੍ਰਾਪਤ ਕਰੋ ਜੀ ਅਜਿਹਾਂ ਅੰਦਰ ਦਾ ਗਿਆਨ ਪ੍ਰਾਪਤ ਕਰ ਲਿਆ ਹਾਂ ਦੀ ਗੱਲ ਹੈ ਜਿਨ੍ਹਾਂ ਨੇ ਜਾਣ ਲਿਆ ਸਭ ਕੁਝ ਤੱਕਦਾ ਸਿਖਰ ਜਾਣ ਲਿਆ ਜੀ ਇਹਨਾਂ ਨੇ ਬਸ ਉਹ ਤੜਗਾ ਤੱਕਦਾ ਜੋ ਦੱਸਦੇ ਵੀ ਹੈਗੇ ਨੇ ਉਹਨਾਂ ਦੇ ਗਲੇ ਆ ਰਹੀ ਨੂੰ ਠੀਕ ਹੈ ਪਰ ਜਾਣਿਆ ਗੁਰਬਾਣੀ ਚ ਹੋਈਆਂ ਜਿਨ੍ਹਾਂ ਨੇ ਜਾਣਿਆ ਗੁਰਬਾਣੀ ਉਹਨਾਂ ਨੇ ਲਿਖਿਆ ਠੀਕ ਹੈ ਜੀ ਇੱਥੇ 19ਵੇਂ ਛੰਦ ਦੀ ਸਮਾਪਤੀ ਹੈ ਜੀ ਹਾਂ ਜੀ